ਅਸ਼ਟਪਦੀ ਬ੍ਰह्मज्ञानी सदा निर्वेद ਹੁਣ ਬ੍ਰह्मज्ञानी ਦੀ ਸਾਰੀ ਅਸਪਦੀ ਆਉਗੀ ਉਰੇ ਜੇ ਵਿਆਖਿਆ ਕਰਕੇ ਤੁਸੀਂ ਕੋਈ ਵਜ੍ਹਾ ਹੀ ਨਹੀਂ ਕਿ ਬ੍ਰह्मज्ञानी ਨੂੰ ਰੋਕ ਜਾਣ ਸਕੋ ਨਾਲੇ ਕੋਲ ਬ੍ਰह्मज्ञानी ਦੀ ਅਸਪਦੀ ਸੀ ਤਾਂ ਕਿ ਕੋਈ ਝੂਠਾ ਬ੍ਰह्मज्ञानी ਨਾ ਬਣ ਜਾਏ ਅੱਜ ਸਾਰੇ ਝੂਠੇ ਬ੍ਰह्मज्ञानी ਕਿਉਂਕਿ ਅਰਥ ਬਦਲਦਾ ਅਰਥ ਬਦਲਦਾ ਇਹ ਸਾਸਪਦੀ ਦੇ ਜਿਹੜੀ ਕਿ ਬ੍ਰह्मज्ञानी ਨਖਲੇ ਨੂੰ ਫੜਨ ਵਾਲੀ ਅਸਪਦੀ ਸੀ ਉਹਦੇ ਅਸਲੀ ਕੀਨਾਰਤ ਕਰਦੇ ਸੌਰੀ ਫਿਰ ਮੈਂ ਨਹੀਂ ਬੋਲਦਾ ਅਰਥ ਹੈ ਅਰਥ ਹੈ ਜੇ ਕਰਦੇ ਨੇ ਇਦਾਂ ਹੀ ਹੋ ਜਾਂਦਾ ਹੋਵੇ ਹਾਂਜੀ ਆ ਵਰਪਗਿਆਦੀ ਕੌਣ ਹੈ ਜੇ ਕੋਈ ਵਰਪਗਿਆਦੀ ਹੈ ਚਲੋ ਬੰਦ ਲਿਆ ਤੁਸੀਂ ਕਾੜੀ ਬੰਦ ਸਾਚਾ ਸਾਚਾ ਵੀ ਤੁਹਾਨੂੰ ਲੱਗਿਆ ਪਹਿਲੀ ਦਿਨ ਅਜ ਹੈਗਾ ਆਵਰ ਨਾਲ ਭੇਜੇ ਇੱਕ ਦਿਨ ਕੋਈ ਚਲੇ ਵੀ ਤੁਹਾਨੂੰ ਤੁਹਾਨੂੰ ਪਤਾ ਜੀ ਲੱਗਣਾ ਹੋਵੇਗਾ ਇਹ ਤੁਹਾਨੂੰ ਦੁੱਖਾ ਦੇ ਸਰਦਾ ਆਮਦ ਨੂੰ ਵੀ ਬਰਵਾਦਨਾ ਦੇਤੀ ਨਾਂ ਦੇ ਲੱਛਣ ਫਿਰ ਆਦੀ ਹੋਰ ਕਹਾ ਗਿਆ ਹੋਰ ਕਹਾਂ ਡਾਇਗਨੋਸ ਕਿਵੇਂ ਕਰਨਾ ਸਾਰਾ ਟੈਸਟ ਪੂਰੇ ਕਿਵੇਂ ਲੈਣਾ ਪਰਮ ਗਿਆ ਦੀ ਸਲਾਹ ਲੈ ਕਦੇ ਵੀ ਮਾਇਆ ਚ ਲਫਤ ਗੱਲ ਨਹੀਂ ਕਰਦਾ ਉਹਉਣ ਵਾਲੀ। ਯਾ ਤਾਂ ਰਹਿੰਦਾ ਚੁੱਪ। ਕੋਈ ਗੱਲ ਕਰਦਾ ਕੋਈ ਗੱਲ। ਜੇ ਹੋਰ ਗੱਲ ਕਦੇ ਕਰਦਾ ਵੀ ਹੈ। ਤੁੰ ਤਵੇਂ ਇਹ ਕਰਦਾ ਵੀ ਹੈ। ਗੱਲ ਪੈ ਜਾਂਦੀ ਹੈ। ਤਾਂ ਇਧੋਂ ਉੱਪਰ ਪਰੇ। ਸੁਨਿਆ ਸੁਣਿਆ ਠਾਠਾ ਬੋਲ। ਵੀ ਲੈ ਜਦ। ਬਹੁਤੀ। ਜਿਆਦਾ ਜਦ। ਫੱਟ ਤਾਂ ਜ਼ਬਰੇ ਲੇਵਾ ਦੀ ਠਾਟਾ ਬੰਗਾ ਥੋੜਾ ਜਿਹਾ ਵਾਸਤੇ ਹੁੰਦਾ ਹੈ ਵੀ ਜੇ ਤੁਸਾਲ ਆ ਗਈ ਤਾਂ ਅਸਤਾ ਖੇਲ ਨਹੀਂ ਦੋ 1 ਮਿੰਟ ਉਹਨੂੰ ਟਾਈਮ ਬਣ ਗਿਆ ਤੇ ਕੱਲਦੇ ਉਹ ਕਿਤੇ ਗੱਲ ਦੋ ਹਾਂਜੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਵਿੱਚ ਕਮਲ ਜੈਸੇ ਜਲ ਵਿੱਚ ਕਮਲ ਉਲੇ ਜਿਵੇਂ ਜਲ ਦੇ ਵਿੱਚ ਕਮਲ ਹੁੰਦਾ ਕਮਲ ਦਾ ਬੀਜ ਨਹੀਂ ਹੁੰਦਾ ਬੀਜ ਤੋਂ ਕਮਲ ਹੀ ਪੈਦਾ ਹੋਇਆ। ਜਲ ਵਿੱਚੋਂ ਹੀ ਕਮਲ ਪੈਦਾ ਹੁੰਦਾ। ਇੱਕ ਹੋਰ ਹੈ ਜਪਤੀ ਦੀ ਬੂਟੀ। ਉਹ ਵੀ ਬੂਟੀ। ਉਹ ਵੀ ਪਾਣੀ 'ਚੋਂ ਪੈਦਾ ਹੁੰਦੀ ਹੈ। ਪਾਣੀ 'ਚੋਂ ਹੀ ਚਲੋ ਕਮਲ ਪੈਦਾ ਹੁੰਦਾ ਪਾਣੀ 'ਚੋਂ ਪੈਦਾ ਹੋਇਆ। ਬੀਜ ਹੈ ਨਹੀਂ ਹੈ ਆਪਾਂ ਬੈਠੇ ਸੀ ਕੋਈ ਚੀਜ਼ ਤਾਂ ਹੋਇਆ ਸਰ। ਉਹ ਉਹ ਬੀਜ ਮੰਨ ਲੈਣਿਆ। जला पऊगा अंदर पानी की कोष्टा होवे कमल पर पानी तो ही पड़या है टोटल मिट्टी जदी जड़ है हालांकि पानी वाली जड़ी मिट्टी है पानी बीच मिट्टी है जड़ ओथो फिर भी पानी तो बखरा खड़ा है जित्ता पानी भर जावे जन्ना बर्झी भरी होवे कम लुत्ते ही जैंदा जे मिट्टी जी जड़ होवे ता डूब जवे ਕਮਾਕਾ ਥਲੂ ਤੇ ਹੀ ਰਹੂਗਾ ਆਕਾਸ਼ ਵਿੱਚ ਜਿੰਨਾ ਮਰਜੀ ਪਾਣੀ ਹੋ ਉਹ ਨਹੀਂ ਚੋੜੂਗਾ ਉਹ ਥਲੇ ਜਮੀਂ 'ਚ ਘੜਾ ਹੋਵੇ ਫਿਰ ਤਾਂ ਪਾਣੀ ਹੋ ਆਜਾ ਜਮੀਂ 'ਚ ਡੁੱਬ ਜੇ ਆਪਣੀਆਂ ਖੇਤੀਆਂ ਡੁੱਬਦੀਆਂ ਨਹੀਂ ਪਾਣੀ 'ਚ ਜਮੀਂ 'ਚ ਘੜੀਆਂ ਨੇ ਉਹ ਜਲ ਮੈਂ ਕਮਲ ਆਇਆ ਧਰਤੀ ਉਹਦਾ ਕੋਈ ਤਨਾਸ਼ ਨਹੀਂ ਫਿਰ ਵੀ ਜਲ ਨਾਲ ਵੀ ਉਹ ਨਹੀਂ ਜੁੜਿਆ ਹੋਇਆ ਜੇ ਉਸੇ ਜਲ ਨਾਲ ਜੁੜਿਆ ਹੋਵੇ ਜਿਹੜਾ ਨਵਾਂ ਆਇਆ ਉਹਦੇ ਉੱਤੇ ਜਲਾ ਜਾਵੇ ਜੇ ਉਹ ਜਲ ਹੋਵੇ ਜਲ ਜੇ ਉਹ ਕਮਲ ਜਿੱਥੇ ਕਮਲ ਹੈ ਪਾਣੀ ਉਹਦੇ ਵਿੱਚ ਫਿਕਸੋ ਜਵੇ ਉਸ ਜਲ ਦੇ ਵਿੱਚੇ ਫਿਕਸੋ ਹੋਵੇ ਉਦੀ ਚੜ ਪਾਕਿਸਤਾਨੀ ਉੱਤੇ ਆ ਗਿਆ 4-4 ਫੁੱਟ ਆਏ ਜਲ ਦੇ ਨਾਲ ਨਹੀਂ ਜੁੜਿਆ ਹੋਇਆ ਉਹ ਜਲ ਬਗੋ ਨੇ ਨੁੱਪਣਾ ਲਿਆ ਉਹ ਜਲ ਤੋਂ ਲੇਪ ਹੈ ਫਿਰਦੀ ਹਾਲਾਂਕਿ ਜਲ ਚੋਂ ਭਰਾਗ ਲੈਂਦਾ ਬਹੁਤ ਹੀ ਜਲ ਕਮਲ ਵਾਲੀ ਇੱਕ ਤਾਂ ਦੀ ਹੈ ਇੱਕ ਕਮਲ ਦੀ ਹੈ ਦੋਹੇ ਮਸਾਲਾ ਨੇ ਦਾਤ ਕੋਈ ਮਰਗਾਪੀ ਦੀ ਹੈ ਸੈਂਸ ਵਿੱਚ ਉਹ ਕਿ ਮਰਗਾਪੀ ਦੇ ਖੱਪ ਆਣੇ ਨੂੰ ਜਜ਼ਬ ਨਹੀਂ ਕਰਦੇ ਐਂ ਕੀਤਾ ਬਹੁਤ ਝੜ ਜਾਂਦਾ ਉੱਪਰ ਪਾਣੀ ਲੱਗਦਾ ਵਿੱਚੇ ਨਹੀਂ ਅਸਰ ਕਰਦਾ ਸਮਝੋ ਪਰ ਛਿਕਨੇ ਹੁੰਦੇ ਨੇ ਉਹ ਦੇਖੋ ਚਰਬੀ ਦੇ ਬਣੇ ਹੁੰਦੇ ਨੇ ਭਾਰੀ ਭਾਰੀ ਨਹੀਂ ਉਹ ਉਹ ਝੜਦੀ ਐ ਪਰ ਜਦੋਂ ਝੜ ਜਾਂਦਾ ਉੜ ਜਾਂਦੀ ਐ ਜਾਂ ਮਰਦੀ ਐ ਜਿਹੜਾ ਅਵਸਥਾ ਮਾਇਆ ਦੇ ਵਿੱਚ ਉਹ ਨੂੰ ਕੋਈ ੜਕਾ ਨਹੀਂ ਬਣਦੀ ਮਾਇਆ ਜਿਵੇਂ ਸਰੀਰ ਛੱਡਦਾ ਆਇਆ ਜਾਈ ਮਸਲਮ ਇੱਕ ਤੀਜੀ ਮਿਸਾਲ ਦਿੱਤੀ ਸੱਪ ਦੀ ਕਾਂਚ ਉਹ ਘਟਿਆ ਮਿਸਾਲ ਹੈ ਗੁਰਬਾਣੀ ਦੀ ਉਹ ਦਿੱਤੀ ਆ ਇਹਨਾਂ ਨੇ ਜਰੂਰ ਬਿਲੇ ਆ ਨੇ ਸੱਪ ਜਿਵੇਂ ਕਾਂਝ ਲਾ ਦਿੰਦਾ ਪਹਿਲੀ ਗੱਲ ਕਾਂਝ ਸੱਪ ਦਾ ਇਸਰੀਰ ਹੁੰਦਾ ਮਾਇਆ ਕਦੇ ਵੀ ਸਾਡੇ ਸਰੀਰ ਦਾ ਹੈ ਸਾਡੀ। ਸਰੀਰ ਚੋਂ ਕਾਹ ਦਾ ਪੈਦਾ ਹੋਈ ਹੈ? ਕਿਉਂ ਰੀ ਇਹ ਪਸੰਦ ਦਿੱਤੀ ਹੁੰਦਾ ਹੈ ਇਹ ਕਹਿ ਲੱਗੇ। ਗੁਰਬਾਣੀ ਦੇ। ਕਾਂਜੇ ਸੱਪ ਦੇ ਸਰੀਰ ਚੋਂ ਪੈਦਾ ਹੋਈ ਹੈ। ਆਤਮਾ ਸਰੀਰ ਚੋਂ ਪੈਦਾ ਨਹੀਂ ਹੋਈ, ਆ ਸਾਡਾ ਸਰੀਰ ਆਤਮਾ ਚੋਂ ਪੈਦਾ ਨਹੀਂ ਹੋਇਆ। ਜੇ ਸਮਝੀਂ। ਤਪੋ ਦੀ ਆਤਮਾ ਚੋਂ ਪੈਦਾ ਨਹੀਂ ਹੋਈ। ਕਾਂਜੀ ਜੀ ਜੋ ਬਾਦਾਂ ਹੀ ਇਹਨੂੰ ਵਾਯਾ ਚੋ ਵਾਯਾ ਨੂੰ ਝੜ ਰਹੀ ਆ ਆਤਮਾ ਨੂੰ ਕਿਤੇ ਝੜਿਆ ਆਤਮਾ ਨਾਲ ਜੀਵਨ ਦਾ ਝੜ ਗਿਆ ਉਹ ਸਰੀਰ ਤਾਂ ਫੇਲ ਨਹੀਂ ਫਰਦਾ ਉਹੀ ਜੇ ਕਾਂਜਲਾਤੀ ਪੈਦਾ ਫੇਰ ਵੀ ਹੋਈ ਆ ਭੁੱਖ ਤਾਂ ਫੇਰ ਵੀ ਹੋਈ ਆ ਜਾਂ ਤਾਂ ਫੇਰ ਵੀ ਹੋਈ ਆ ਲੱਛਣ ਕਿਹੜਾ ਬਦਲੇ ਕੱਝ ਨਹੀਂ ਤੇ ਉਹ ਸੂਤਲ ਨੂੰ ਤਾਂ ਕੰਚੀ ਨੂੰ ਸੂਤਲ ਹੋ ਗਏ ਤਾਂ ਛੱਡ ਜਾਓਗੇ ਜਿਉਂ ਪੰਛੀ ਜਿਹਾ ਹੰਗ ਉਹ ਤਾਂ ਉਹ ਕਿਹਾ ਟੋਟਰ ਬੋਡੀ ਪਿੱਛੇ ਕੁੰਜ ਜੋੜ ਟੋਟਰ ਬੋਡੀ ਨੂੰ ਕਿਹਾ ਉਹਦਾ ਕਪੜਾ ਟੋਟਰ ਬੋਡੀ ਪਿੱਛੇ ਜੰਦੀ ਟੋਟਰ ਬੋਡੀ ਨੂੰ ਕਿਹਾ ਛੱਡ ਜਾਓਗੇ ਕਿ ਛੱਡ ਨਹੀਂ ਬਹੁਤੀ ਉਹ ਛੱਡ ਦਿੰਦਾ ਕੁਝ ਸਭ ਛੱਡ ਦਿੰਦਾ ਸੱਪ ਰਹਿੰਦਾ ਐ ਤੁਸੀਂ ਰਹੋਗੇ ਉਹ ਸੱਪ ਐਂ ਕਿਹਾ ਉਹ ਪ੍ਰਮਾਣ ਦਿੰਦਾ ਹੈ ਜਿਵੇਂ ਸੱਪ ਜਿਉਦਾ ਰਹਿੰਦਾ ਹੂ ਬੂਹ ਹੋ ਜਾਏ ਸੱਪ ਕ ਬਾਹਰ ਛੱਡ ਜਾਂਦਾ ਹਾਂਜੀ ਉਹ ਐਗਜ਼ੈਂਪਲ ਹੋਰ ਸੈਂਸ ਜਾਈ ਹੋਈ ਹੈ ਉਹ ਸੱਪ ਆ ਐਵੇਂ ਆਤਮਾ ਹੂ ਬੂਹ ਥੋੜੀ ਨਿਕਲ ਜੂਗੀ ਹੋਰ ਐਂਗਲ ਤੋਂ ਹੈ ਹੋਰ ਦਾ ਵੀ ਫਰਕ ਹੈ ਕਿਉਂਕਿ ਨਹੀਂ ਆਈ ਇਹ ਵੀ ਬਹੁਤ ਧ੍ਰਿਤੀ ਵਾਲੀ ਹੁੰਦਾ ਹੈ ਨਾ ਜਿਆਦਾ ਧ੍ਰਿਤੀ ਉਤੇ ਹੀ ਤਰਦਾ ਹੈ ਤਸ਼ਵੀਰ ਜੇ ਉਹ ਆ ਜਾਂਦੀ ਕਜੀਵਾਨੀ ਉਹ ਸੈਕਟਰ ਤੋਂ ਕੱਚੀ ਹੈ ਇਹ ਮਸਾਲ ਹੂੰ ਉਹ ਸੈਕਟਰ ਤੋਂ ਮਸਾਲ ਕੱਚੀ ਹੈ ਐਸ ਹੈਕਰ ਤੋਂ ਮਸਾਲ ਪੱਕੀ ਹੈ ਜਿਹੜਾ ਅੱਲਾਹ ਦਾ ਸ਼ਰੀਰ ਹੈ ਉਹ ਉਸ ਤੌਰ ਸਭ ਤੁਹਾਨੂੰ ਦਿਖਾਤਾ ਉਹ ਦਿਖਾਉਂਦਾ ਕਿ ਉਹ ਮਾਇਆ ਦੀ ਮਸਾਲ ਦਿੱਤੀ ਹੈ ਮਾਇਆ ਦਾ ਸੱਚ ਇਹ ਇੱਕ ਤਾਂ ਸਭ ਬਾਹਰ ਰਹੇਗਾ ਕੱਜ ਇੱਕ ਸਭ ਚਲਿਆ ਗਿਆ ਬਾਹਰ ਛੱਡ ਗਿਆ ਉਹਨੂੰ ਐ ਸਰੀਰ ਨੂੰ ਛੱਡ ਕੇ ਚਲੇ ਜਾਓਗੇ ਹੋਰ ਇਹ ਤਾਂ ਕੋਈ ਮਸਾਲ ਹੈ ਜੀ ਉਹ ਉਹ ਸਜਾਦੀ ਹੁੰਦੀ ਹੈ ਕੋਈ ਕੁਝ ਵੀ ਛੱਡ ਵੀ ਜਾਂਦਾ ਸੱਪ ਜਿਵੇਂ ਸ਼ੀਸ਼ੇ ਜ ਆਪਣਾ ਇਹ ਮਗਰ ਮੈਂ ਜਿਹਾ ਛਾਈ ਸ਼ੀਸ਼ੇ ਦੇ ਵਿੱਚ ਜਰਾ ਆਪਣਾ ਛਾਈ ਹੋਵੇ ਛੱਡਦਾ ਕੰਝ ਨਹੀਂ ਹਾਂ ਦੇਖ ਨਹੀਂ ਛੱਡ ਦੇਖ ਉਹ ਕੀ ਕਿਹਾ ਸੁਭਾਅ ਨਹੀਂ ਛੱਡਦਾ ਆਪਣਾ ਜਾਇ ਸਰੀਰ ਛੱਡ ਜਾਂਦਾ ਜੇ ਸੱਚ ਦਾ ਵਿਰੋਧੀ ਆ ਤਾਂ ਵਿਰੋਧੀ ਉਹ ਮਰ ਜਾਂਦਾ ਅਗਰਾਂ ਜਨ ਸਾਡਾ ਵਿਰੋਧੀ ਕੇ ਪਰ ਜਦੋਂ ਸਾਡਾ ਵਿਰੋਧ ਕਰੀਦਾ ਇਹ ਕੋਲਾਂ ਇਹਨਾਂ ਜਲਦੀਆਂ ਹੁੰਦੀਆਂ ਮੇੜਿਆਂ ਦੀ ਵੀ ਕੋਲ ਹੈ ਅਰਾਮੀਆਂ ਦੀ ਵੀ ਕੋਲ ਹੈ ਗੁਰੂ ਕੀ ਅੰਦੀ ਵੀ ਕੋਲ ਹੈ ਸੋਚਿਆ ਰਹਿਆਂ ਨੂੰ ਕੋਲਾਨੇ ਕੁੜਿਆ ਰਹਿਆਂ ਦੇ ਬਿਲਕੁਲ ਆਨੇ ਇਸਲਾਮ ਦੇ ਵਿੱਚੋਂ ਉਹਨਾਂ ਦੇ ਚੜਿਆ ਹੋਇਆ ਜਨਮ ਲਊਗਾ ਪਰਮਾਰੀ ਵੀ ਨਿਕਿਆ ਹਾਂਜੀ ਹਾਂ ਪਹਿਲਾ ਪਿਓ ਇਮਪਿਅਰਸ ਇੰਪਿਉਰਿਟੀਜ਼ ਆਫ ਦੀ ਹੈ ਜੈਸੇ ਜਲਮ ਹੈ ਨਾ ਨੰਦਰਾ ਲਈ ਇਹ ਸਭ ਸਾਲ ਦੇ ਵਿਚਾੜ ਲੈਦਾ ਹੈ ਹਲੇ ਜਿਵੇਂ ਜਲ ਵਿੱਚ ਕਮਲ ਅਲੇਪ ਅਲੇਪ ਰਹਿੰਦਾ ਜਲ ਦੇ ਵਿੱਚ ਲਿਪਟ ਨਹੀਂ ਹੈ ਜਾਂਦਾ ਜਦ ਮੱਝੀ ਚੱਕ ਲੋ ਜਲ ਥੱਲੇ ਹੋ ਅਟ ਵੱਖਰਾ ਜਲ ਤੇ ਥਣੋ ਆ ਡੁੱਬਦਾ ਹੈ ਜੀ ਗੱਲ ਔਰ ਜਲ ਬਿਨਾ ਜੀਵਨ ਵੀ ਨਹੀਂ ਹੈਦਾ ਜਲ ਦੀ ਨੂੰ ਲੋੜ ਹੈ ਜੇ ਕਮਲ ਜਲ ਤੋਂ ਬਾਹਰ ਜਾਊਗਾ ਮਰ ਜਾਊਗਾ ਸਰੀਰ ਕਰਕੇ ਰਹਿਣਾ ਪਊਗਾ ਉਹ ਨੂੰ ਜਿਵੇਂ ਕਮਲ ਪਾਣੀ ਵਿੱਚ ਹੈ ਮਜਬੂਰੀ ਹੈ ਸਰੀਰ ਦੀ ਕਮਲ ਦੀ ਪਰ ਰਹਿਊਗਾ ਲੈ ਜਿਵੇਂ ਕਮਲ ਹੁੰਦਾ ਖਾਣਾ ਵੀ ਦੋ ਸੋਹਿਆ ਅ ਲੋੜ ਤੋਂ ਵੱਧ ਪੰਜਾਬ ਦੀ ਹੈ ਪਾਣੀ ਦਾ ਬਹੁਤ ਸਾਰਾ ਹੀ ਪਾਣੀ 흘ਾਜਦਾ ਤਾਂ ਕੱਲਾ ਹੀ ਹੋ ਜੂ ਸਬਰ ਨਾਲ ਗੰਦਾ ਪਾਣੀ ਵੀ ਪਾਣੀ ਜੋ ਵੀ ਖਰਾਬ ਸਬਰ ਨਾਲ ਆਉਂਦਾ ਵਾੜੀ ਚੜ੍ਹਾਈ ਸ਼ਕਤੀशाली ਹੋਵੇ ਕਮਲ ਉੱਡਾ ਕੇ ਹੁੰਦਾ ਬੜਾ ਜਿੰਦਾ ਸਾਡੀਆਂ ਫਜ਼ਲਾਂ ਬੜੀਆਂ ਛੋਟੀਆਂ ਹੋ ਜਾਂਦੇ ਤਕੜੀ ਤਸਤੀ ਚ ਫਜ਼ਲ ਤਕੜੀ ਹੋ ਜਾਂਦੀ ਹੈ ਵਾੜੀ ਤਸਤੀ ਚ ਫਜ਼ਲ ਮਾੜੀ ਜਾਂਦੀ ਕਮਲ ਹੋ ਜਾਏਗਾ ਉਹਦਾ ਸਾਈ ਦਾ ਸੈਂਟਰ ਕਈ ਐਂਗਲ ਤੋਂ ਹੈ ਗੱਲ ਵਿਚਾਰ ਦੀ ਬਣੀ ਹਾਂ ब्रह्म ज्ञानी सदा निर्दोख जैसे सूर सर्ब को सोख हां ब्रह्म ज्ञानी सदा निर्दोख दोख नहीं लगदा जिमे सूर सारे पानी पानी चढ़ाई भी खड़ा होवे गद्दी नाली खड़ा होवे चाहे अपना सरोवर चढ़ा होवे चाहे धंधा होवे चाहे जैसे छपड़दा होवे सारे नुंै सवाई ਉਹ ਉਡੀਕੋ ਮਾਇਲ ਲੱਗਦੀ ਉਹ ਜਿਹੜਾ ਪਾਣੀ ਖਿੱਚਦਾ ਜਿੱਥੋਂ ਮਰਜੀ ਖਿੱਚ ਲਵੇ ਸੂਰਜ ਉਹ ਫਿਰ ਜਦ ਬਰਸਦਾ ਦੁਬਾਰਾ ਉਹਦੇ ਵਰਗਾ ਹੋ ਨਿਰਵਨ ਫਿਰ ਚੱਲ ਨਹੀਂ ਹੁੰਦਾ ਸਗੋਂ ਪ੍ਰਤੀਕਿਰ ਕਰ ਦਿੰਦਾ ਬਿਲਕੁਲ ਗੱਡੇ ਤੇ ਗੱਡੇ ਥਾਂ ਤੇ ਪਾਣੀ ਆਇਆ ਹੋਇਆ ਕਿਸੇ ਵੀ ਬਾੜੇ ਤੋਂ ਮਾੜੀ ਕੈਟਾਗਰੀ ਚੋ ਜਿਵੇਂ ਸਦਕਾ ਕਸਾਈ ਆ ਗਿਆ ਤਾਂ ਮਾੜੀ ਕੈਟਾਗਰੀ ਕੀ ਹੋਊ ਉਹਨੂੰ ਵੀ ਉਹੇ ਨਾਲ ਦਾ ਹੀ ਬਣਾ ਕੇ ਰੱਖਿਆ ਪਿਆ ਪਾਣੀ ਉਥੋਂ ਸੋਕੇ ਸੀ ਉਹਨੂੰ ਚੱਕਿਆ ਸੀ ਪਾਣੀ ਕਿੱਥੇ ਚੱਕਿਆ ਸਦਕਾ ਕਸਾਈ ਨੂੰ ਪਾਣੀ ਚੱਕਿਆ ਉਹਦੇ ਰਾਮੂਦ ਸੀ ਰਾਮੂਦ ਕੋਲ ਜੋ ਸੀਓ ਦੇ ਚੱਕ ਲਿਆ ਖਿੱਚ ਲਿਆ ਨਾੜੇ ਹੀ ਬਰਸਾਤ ਆ ਜਾਵੇ ਸੂਰਜ ਦੀ ਇਹ ਸ਼ਕਤੀ ਹੈ ਅਸੰਸਾਰੀ ਸੂਰਜ ਦੀ ਵੀ ਗੱਲ ਹੈ ਸੂਰਜ ਇਹ ਸਭੋ ਵੀ ਸੂਰਜ ਕੇ ਹੁਆ ਹੈ ਬੜੇ ਆਪਾਂ ਨੇ ਦੇਖਿਆ ਜਿਹੜਾ ਪਾਣੀ ਆਪਾਂ ਪੀਂਦੇ ਹਾਂ ਉਹ ਨਾਲੀ ਦਾ ਕਦੇ ਬੰਦੇ ਸੋਹਦਾ ਵੀ ਪਾਣੀ ਲੋਕਾਂ ਦੇ ਪਿੱਛੇ ਸੋਚਿਆ ਜਿਹੜਾ ਸਾਹ ਲੈਨੇ ਆਪਾਂ ਹਵਾ ਛੱਡਦੇ ਆ ਸਾਰੇ ਲੋਕ ਵਿੱਚ ਸਾਹ ਛੱਡਦੇ ਬਦੂ ਬਦੂ ਬਦੂ ਬੁਣੀ ਹੋਇ ਰਿਹਾ ਬਚੇ ਨੂੰ ਅੱਗੇ। ਸਿਰਕੋ ਦੀ ਜਰਾਬੋਤੀ। ਇਹ ਵੀ ਰਫਾਈਨਰੀ ਹੁੰਦੀ ਹੈ। ਇਹ ਇਹਦੀ ਰਫਾਈਨਰੀ ਵੀ ਨਾਲ ਲੱਗੀ ਹੋਈ ਹੈ। ਆਦਰਾਸ ਰਫਾਈਨਰੀ ਵਿੱਚ ਵੱਡ ਬੈਠੇ ਹੁਣ ਪਿੱਟਦੇ ਨੂੰ। ਸਰਕਾਰੀ ਗਰਾਮ ਕਾਨ। ਉਹਦੀ ਕੋਣੀ ਬਣਾਈ ਜਿਹੜੀ ਬਣੀ ਸੀ। ਸਾਡੇ ਦਾ ਬਣੀ ਬਣਾਈ ਨਹੀਂ ਦਾ ਖੋਦੀ ਅਸੀਂ ਬਣਾਉਣੀ ਜ਼ਵਾ ਜਿੰਨੇ ਜਿਆਦਾ ਪੜ ਲੈਗੇ ਉਹਨੇ ਮੂਰਖ ਜਿਆਦਾ ਹੋਗੇ। ਵਾਜ ਦੇਖ ਰਹੇ ਨੇ ਬਾਜ ਸਿਆਣਿਆਂ ਨੇ ਰੋਲਾ ਪਾਇਆ ਸੁਣਾ ਜੀ ਬਤਾਉਣ ਦੇ ਦੱਸ ਜੀ ਹਾਂ ਜੀ ਬਤਾਉਣ ਦੇ ਦੱਸ ਮੜ ਲੈਣ ਹਾਂ ਅੱਜ ਅਸਲਾ ਆਇਆ ਹੋਇਆ ਸਾਡਾ ਤਾਂ ਰੋਜ ਇਹ ਆਉਂਦਾ ਵਾਜ ਸਹੀ ਸ਼ੈਤਾਨ ਉਹ ਵਾਜ ਬੰਦ ਕਰਨ ਕੇ ਵੀ ਨਾ ਹਰ ਦਿਲ ਦੀ ਸੌਅ ਸੀ ਆਪਣੇ ਹੌਸਲ ਕਰਕੇ ਕੁਝ ਵੀ ਕਰ ਸਕਦੇ ਹਾਂ ਜੀ ਬ੍ਰਹਮ ਗਿਆਨੀ ਕਹੇ ਦ੍ਰਿਸ਼ਟੀ ਸਮਾਨ ਜੈਸੇ ਰਾਜ ਰਾਤ ਕੋ ਤੁਲਕ ਵਾਗ ਜਪ ਗਿਆਨੀ ਕਹੇ ਦ੍ਰਿਸ਼્ય ਸਮਾਨ ਸੂਰਜ ਦੀ ਵੀ ਦ੍ਰਿਸ਼ਿ ਸਮਾਨੇ ਸੂਰਜ ਕਰਨਾ ਜਿੰਨਾ ਕਰਨਾ ਪੈ ਗਿਆ ਨਾਰੀ ਤੇ ਜਾ ਕੇ ਅੱਗੇ ਤੋਂ ਦੂਜਾ ਕਰਨਾ ਐਸਾ ਨਹੀਂ ਕਹਿੰਦਾ ਜਨਵਤਨਾ ਲਾਇਓ ਤੁਸੀਂ ਹੱਥ ਹੋ ਗਿਆ ਉਹ ਕਹਿੰਦਾ ਕੋਈ ਪਾਣੀ ਜਿਹੜਾ ਉੱਤੇ ਜਾਂਦਾ ਹਵਾ ਨੇ ਕਹਿੰਦੀ ਇੰਨੇ ਵਹੁੰਦੇ ਰਹੋ ਤੁਸੀਂ ਅਲੱਗੋ ਆਪਾ ਬਿਚੀ ਜਿਹੜੀ ਬਦਬੂਰ ਨਾ ਦਾਦੇ ਮੈਂ ਤੇ ਤੱਤਾਂ ਦੇ ਸੁਹਾਏ ਹਵਾ ਦਾ ਇਹ ਸੁਹਾਏ ਪਾਣੀ ਦਾ ਇਹ ਤੱਤਾਂ ਦੇ ਸੁਹਾਏ ਐ ਕਹਿੰਦੇ ਨੇ ਤੱਤਾਂ ਨੇ ਸੁਭਾਅ ਵੀ ਲੈਣੇ ਨੇ ਤਸਦੀ ਦਾ ਸੁਭਾਅ ਵੀ ਹੈ ਆ ਗੁਰ ਰੋਹ ਆ ਵੀ सब ਕਾਰਨ ਹਜਮ ਕਰ ਜਾਂਦੀ ਹੈ ਸਭ ਯਾਰ ਤੋਂ ਦੀਏ ਗਾਥ ਮਨ ਜੋ ਵੀ ਹੈ ਚੈ ਕੁਛ ਵੀ ਸਭ ਸਭ ਹੁੰਦਾ ਹੈ ਰਾਗ ਨੂੰ ਸਭ ਤੋਂ ਵੱਧ ਮੰਨਿਆ ਜਾਂਦਾ ਹੈ ਚੈ ਕਾਸ ਦੀ ਉਹ ਜੋ ਰਾਗ ਨੂੰ ਸਭ ਤੋਂ ਵੱਧ ਮੰਨਿਆ ਜਾਂਦਾ ਜੇ ਕੋਈ ਬਿੱਤਰ ਨਾ ਜਿਹੜੀ ਬੜੀਆਂ ਨੇਕ ਰਾਹ ਹੈ ਜਿਹਦੇ ਸੇਵਾ ਚੱਲਦਾ ਸਾਨੂੰ ਰੋਕਾਂ ਜਗੋਂ ਫੋੜ ਦੋ ਸਭ ਦਾ ਹੀ ਭਾਇਆ ਬੁਸਤ ਰਿਹਾ ਹੋ ਕੱਚਾਂ ਦੇ ਹੀ ਬਹੁਤ ਕੀਮਤੀ ਹੈ ਰਾਹ ਇਹ ਪੈਰਾਂ 'ਚ ਨਾਲ ਰੁੜਦੀ ਫਿਰੋ ਉਹਨੇ ਤਾਂ ਸੋਚਿਆ ਸੀ ਕਮਤਾ ਦੇ ਵਿੱਚ ਕਮ ਜੋਂ ਪੈਰਾਂ 'ਚ ਆ ਜਿਉ ਉਹ ਫਰੋਸਿਸ ਯੂਨਿਟੀ ਚੱਲਦੀ ਹੈ। ਇਚਾਜ਼ੀ। ਜਾਇਓ ਬਰਬਾਦੀ ਨਹੀਂ ਬੰਦੇ ਇਸ ਸਾਲ ਮੌਕਾ ਨਹੀਂ ਦਿੱਤ। ਰਸਤਾ ਕੋ ਚੱਲਣ ਤੋਂ ਕਿਲਾ ਆਵੇ ਤੋ ਬਰਤ ਤੈਸ ਤੇ ਬਰਤ ਕਵਨ ਫੜ ਪਾਵੇ। ਇਹ ਫਿਰ ਨਸਕੋ ਵਿਸ਼ਤਾਰ ਨਹੀਂ ਲੜਾਇਆ ਤੋ ਫਿਰ ਸਤਾ ਕਾ ਕਰ ਜਾਏ। ਉਹ ਕਹਿੰਦੇ ਉਹ ਤਾਂ ਕਹਿੰਦੇ ਹਫਤੇ ਬਾਅਦ ਜੀ ਨੂੰ ਜੋ ਵਰਦੀ ਕਰ। ਫਟ ਪਿਛਲੇ ਤੌਰ ਤੇ ਨਾ ਕੁਝ ਅਸੀਂ ਇਸ ਜੀਵ ਦੇ ਵਿੱਚੋਂ कोई ਸੁਣਿਆ ਦੁਨੀਆ ਨੇ ਕੁਝ ਲਿਆ ਬਸ ਉਹ ਆਪਣੇ कोई ਸੋਚ ਰਹੇ ਨੇ ਉਹਨਾਂ ਦਾ ਉਹ ਐਂਗਲ ਉਹ ਵੀ ਐਂਗਲ ਕੋਈ ਫਾੜਾ ਨਹੀਂ ਹੈ ਉਹ ਐਂਗਲ ਕੋਫ ਕੋਫ ਦਬੇ ਪਰ ਜਾਨੂ ਪਰ ਸਹਾਂਤ ਕਰਦਾ ਹੈ ਨਾ ਇਦਾਂ ਜਾਨੂ ਉਤਸਾਹ ਤੁਹਾਡੇ ਕੋਲ ਕਬੀਰ ਦੇ ਰਾ ਚੱਲਦਾ ਮੋਹਸਲਾ ਵੀ ਤਾਂ ਮਿਲਦਾ ਵੀ ਇਹ ਰਾਹ ਦੇ ਵਿੱਚ ਕਿੱਡਾ ਵੱਡਾ ਅਫਸਰ ਬਣੇ ਰਹਿ। ਉਹ ਉਹ ਇਹ ਵੀ ਤਾਂ ਪ੍ਰਦਾ ਕੇ ਮੈਨੂੰ ਵੀ ਮਿਲਣੀ ਹੈ। ਰਵਿਦਾਸ ਨੂੰ ਕੀ ਬਣੀ ਹੋਈ ਆ ਕੱਢ ਨੂੰ ਕੀ ਬਣੀ ਹੋਈ ਆ ਉਹ ਵੀ ਤਾਂ ਸਧਾਰਨ ਆਦਮੀ ਸੀ। ਇੱਕ ਲਾਲਚ ਹੈ ਜਿਹੜਾ ਕਹਿ ਲੋ। ਸੁਧਿਆ ਵੀ ਦਾ ਲੱਡੂ ਇਹਦੇ ਆਸਰੇ ਦੂਰੇ ਰੱਡੂ ਛੱਡ ਦਿੰਦਾ ਉਹਨੇ ਅਭੀ ਜੇ ধੂਏ ਛੱਡਦਾ ਤਾਂ ਦੂਆ ਕੁਝ ਬਣਦਾ ਤਾਂ ਛੱਡਦਾ ਚ ਬਰਬਰ ਆ ਗਿਆ ਮੈਂ ਤਾਂ ਧੂਈ ਥਾਲੀ ਵਧੀਆ ਲਾਖੀ ਜੇ ধੂਏ ਆਵੇ ਫਰ ਬਾਹਲੇ ਫਿਰ ਦੇਸੀ ਹੀ ਖਾਂਦਾ ਜਾਂ ਦੇਸੀ ਜੱਟ ਹੋਣ ਇਹ ਆਦਮੀ ਦਾ ਕਿ ਸਵਾਭ ਏ ਇਹਦਾ ਜਿਹੜਾ ਸੁਭਾਅ ਏ ਕਈ ਇਹ ਤੋਂ ਹੀ ਫਾਇਦਾ ਉਠਾਇਆ। ਉਛੇ ਦੇ ਵਿੱਚ ਸੁਭਾਅ ਦੇ ਫਾਇਦੇ ਵੀ ਉਠਾ ਸਕਦੇ ਆ ਅਸੀਂ। ਮਨ ਤੇ ਵਿਚ ਲੋਭ ਹੈ। ਲੋਭ ਨੂੰ ਛੱਡਣਾ ਨਹੀਂ ਹੈ। ਲੋਭ ਤੋਂ ਫਾਇਦਾ ਉਠਾਇਆ ਹੈ। ਲੋਕ ਹੀ ਹੈ। ਤਾਂ ਇਹ ਬੜੀ ਪੱਗ ਦੀ ਰੂਪੀ ਕੋ ਜੂਆ। ਦੁਨੀਆ ਦੀਆਂ ਬੜੀਆਂ ਰਕੀ ਜੰਗਲ ਜੇਸ ਇਸ ਦੁਨੀਆ ਦੇ ਉੱਪਰ ਨਹੀਂ ਬਿੜਿਆ ਇਹ ਨੂੰ ਵਿਦੇਸ਼ ਯਾਰ ਨਹੀਂ ਕਿਹਾ ਹਾਂ ਆ ਜੇ ਸੋਚੋ ਚਾਹੇ ਸਦਾ ਤੇ ਸ਼ਰਨ ਨਾਮ ਦੀ ਲੈ ਉੱਥੇ ਵੀ ਕਹਿੰਦੇ ਫੇਰ ਉਹ ਜਿਹੜਾ ਹੈਗਾ ਮਤਲਬ ਹੈ ਸੂਰ ਸhetra ਰਾਜਾ ਫੇਰ ਉਹ ਕੀ ਕੀਤਾ ਹੈ ਹਮੈਨੂੰ ਪੱਠੇ ਵੀ ਪਾਏ ਹੋਏ ਨੇ ਉਬਰ ਪੱਠੇ ਵੀ ਬਾਏ ਵੀ ਇਹ ਪੌਣੇ ਜੱਜ ਦੇ ਪੱਠੇ ਬਾਹ ਦਾ ਤੱਕ ਦਾ ਗੱਲ ਹੈ ਅਬ ਨਸ਼ੇ ਤੱਕ ਨਹੀਂ ਉਹ ਜਾਣਾ ਹੀ ਨਹੀਂ ਕਿਤੇ ਜਿਹੜਾ ਛੱਡ ਗਿਆ ਇਹਦੇ ਨਾਲ ਹੀ ਤੇਰਾ ਉਹ ਤ੍ਰਿਪਤੀ ਹੋਣੀ ਇਹਦੇ ਤੇਨ ਲੋਕ ਤੇ ਰਾਜਨਾ ਦੀ ਤ੍ਰਿਪਤੀ ਨਹੀਂ ਹੋਣੀ ਤੇਰੀ ਕਿਉਂਕਿ ਉਹ ਤਾਂ ਛੱਡ ਗਿਆ ਹੈ ਤ੍ਰਿਪਤੀ ਹੋਵੇ ਨਾਲੇ ਹੋਊਗੀ ਉਦੋਂ ਸਭ ਰਾਜ ਸਿਸ਼ਟ ਕਹਿੰਦਾ ਇਹ ਅਜੀਬ ਗੱਲ ਕਹਿ ਦਿੱਤੀ ਤਾਂ ਵੀ ਗੱਲ ਆਏ ਸਗਲ ਸਿਸ਼ਟ ਕੋ ਰਾਜਾ ਦੁਖੀ ਆ ਜਾਣਾ ਇੱਥੇ ਇਹ ਤਾਂ ਸਭ ਕੁਝ ਆ ਜਾਣਾ ਇਸ ਨੂੰ ਨਹੀਂ ਆਏਂਗਲ ਵੀ ਆਉਣਾ ਕੋਈ ਆਪ ਲੈ ਨਹੀਂ ਗਿਆ ਉਹ ਕੌਣ ਹੈ ਉਹ ਆਪ ਹੈ ਉਹ ਵੀ ਦੁਖੀ ਹੈ ਜਦੋਂ ਇਹ ਲੈ ਲੋ ਉਹ ਸਾਈਕਲ ਸੇਜ ਦਾ ਰਾਜਾ ਤਾਂ ਆਮ ਦੁਖੀਆ ਕਿਉਂ ਬੇੜ ਪਾਤਾ ਫੱਟੇ ਜਲਾਇਆ ਕੋਇ ਉਹ ਬੇੜ ਦੇ ਪੱਤੇ ਪਏ ਨਾ ਥੱਲੇ ਅੜਗੇ ਹੋਏ ਅਸਾਂ ਸਾਹ ਖਿਣੇ ਹੋਏ ਉੱਡਦਾ ਗਏ ਤਾਂ ਜਲਾ ਜਾਂਦਾ ਗਏ ਤਾਂ ਜਲਾ ਜਾਂਦਾ ਇਹ ਹਾਤਾ ਦੁਖੀਆ ਬੇੜ ਪਾਤਨਾ ਆਪਣ ਤੇ ਜੜਿਆ ਇਹਨਾਂ ਦੀ ਚਿੰਤਾ ਜੀ ਅਗਦਾ ਵੀ ਇਹ ਕਿਵੇਂ ਹੋਣ ਮੇਰੇ ਤੇ ਲੱਗ ਜਾਣਾ ਟੁੱਟ ਗਏ ਮੇਰੇ ਕੋਲ ਕੀ ਨਹੀਂ ਨਾ ਬੇੜ ਨੂੰ ਇਹ ਜਿਹਾ ਜੇ ਕੋ ਬੀਜਾਂ ਤੇ ਰਹੇ ਸੱਦੇ ਨਾ ਜੀਵੇਂ ਰਹੋ ਤੇ ਕੱਚੇ ਟੁੱਟ ਗਏ ਪੇੜ ਪਾਤਾ ਪੰਪੇ ਜਿਹੜਾ ਮਤਲਬ ਇਹ ਇਹ ਲਿਆ ਸੀ ਵੀ ਆਪਣੇ ਪੱਤੇਆਂ ਦਾ ਪੇੜ ਜਾਂਦਾ ਹੈ ਯਾਰ ਜਾਂਦਾ ਹੈ ਨਹੀਂ ਨਹੀਂ ਇਹ ਤਾਂ ਹੈ ਆਪਾਂ ਸੰਸਾਰੀ ਗੱਲ ਕਰਦੇ ਹਾਂ ਫਿਰ ਵੱਡੇ ਪੇੜਾਂ ਉੱਗ ਜਾਂਦੀ ਹੈ ਉਹ ਸਤ ਗੱਲ ਆ ਉਹ ਆਪਾਂ ਗਾਂਂ ਦੀ ਵੀ ਤਾਂ ਗੱਲ ਉਹ ਬੋਤੀ ਥਾਂ ਪਤਰਾ ਲਈ ਚਲੇ ਇਹਨਾਂ ਨੂੰ ਸਾਰੇ ਚਲੇ ਬਣਾਇਆ ਇੰਨੀਆਂ ਪੌੜੀਆਂ ਚਾੜਿਆ ਇੱਕ ਪੌੜੀ ਰਹਿੰਦੀ ਸਾਰੇ ਪੱਤੇ ਹੀ ਨਹੀਂ ਹੁੰਦੇ ਇਹਨਾਂ ਦੀ ਚੱਟਦਾ ਜਲਦਾ ਰੇੜ ਪੌਤਾ ਫੁੱਟ ਦੀ ਗੱਲ ਕਰਦੇ ਸੀ ਹਾਂ ਸੁਭਾਅ ਦੇ ਵਿੱਚ ਸੁਭਾਅਰੇ ਪੱਤੇ ਸੁਫੇ ਰਹੇ ਜਿਨੇ ਪੱਤੇ ਇਹਨਾਂ ਠੁਕੇ ਕਸੂਰ ਉਹਨਾਂ ਦਾ ਗੁਰੇ ਨੇ ਉਦਾ ਭਲਾ ਜਿਹੜਾ कर ਰਿਹਾ ਉਹ ਪ੍ਰੋਫੈਸਰ ਹੈ। ਬੂਰੇ ਦਾ ਭਲਾ ਪ੍ਰੋਫੈਸਰ ਕਰਦਾ ਉਹ ਇਸ ਸਬਾਬ ਨੂੰਣਾ ਪਊਗਾ। ਉਹ ਬੇੜ ਦਾ ਜਿਹੜਾ ਰਸ ਹੈ ਹজম ਤਾਂ ਆਉਗਾ। ਤੇ ਹੋਇਆ ਸਬਾਹੂਗਾ। ਜਿਹੜੇ ਪੱਤੇ ਦਾ ਉਹ ਰਸ ਨਹੀਂ ਜਿਹਨੂੰ ਹਜਮ ਉਹ ਬੇੜ ਨੂੰ ਜੁੜੇ ਨਹੀਂ ਸਕਦਾ। ਦੂਏ ਬੇੜ ਦਾ ਆਪਦੇ ਗਲਮਾ ਬੁਰਵਾ ਲੱਗਦੀ ਐ ਅਨਾਰ ਦੇ ਗਲਮਾ ਨਾਲੋਂ ਲੱਗਦੀ ਐ ਆ ਜੇ ਮੈਂ ਬੁਰਾ ਹਾਂ ਨੇ ਇਹਨੂੰ ਇੱਕ ਰੂਹ ਦੀ ਗਲਮਾ ਲੱਗ ਜਾਂਦੀ ਐ ਜਾਤੀ ਇੱਕ ਆਪਰੂ ਬਾੜਦੇ ਦੀ ਗਲਮਾ ਨਹੀਂ ਲੱਗਦੀ ਮਾੜਦੇ ਨੂੰ ਆਪਣੀ ਗਲਮਾ ਨਹੀਂ ਲੱਗਦੀ ਇਹਦਾਂ ਗਲ ਵੀ ਕੋ ਲੱਗਦਾ ਤੇ ਜੇ ਅਪਰੂ ਕਿਸੇ ਆਪਣੀ ਗਲ ਕੋ ਲਾ ਲਓ ਹੰਬ ਹੋ ਗੇ ਜੱਤੀ ਖੋਣੀ ਜੱਤੀ ਖੋਣੀ ਦੇਦੀ ਹੈ ਇਹ ਦੂਜੇ ਉਤਪਜ ਦੇ ਵਿੱਚੋਂ ਅਸੀਂ ਬਹੁਤ ਗਿਆਨ ਲੈਣਾ ਉਤਪਰ ਚਲਦਾ ਹੈ ਉਤਪੇਚੋਂ ਬਹੁਤ ਗਿਆਨ ਲੈ ਆਸੀਂ ਜੇ ਨਾ ਤਾਂ ਲਾਂ ਦਾ ਪਤਾ ਨਹੀਂ ਤਾਂ ਖਾਨੇ ਜਣੀ ਗੱਲ ਬਿਠਾੜ ਸਕਦੇ ਜੂਵੇ ਪਰ ਤਖ ਨਹੀਂ ਕਰਕੇ ਦਿਖਾ ਸਕਦੇ ਸੰਸਾਰੀ ਸੱਚ ਜਿਹੜਾ ਖੋਜੇ ਪੀ ਹੈ ਜਿਹੜੇ ਦੇਖੋ ਜਿਹੜੇ ਲੋਕਾਂ ਨੇ ਕਲਮ ਚੜ੍ਹਾਉਣੀ ਦੀ ਕਲਾ ਸ਼ੁਰੂ ਕੀਤੀ ਹੈ ਆਖਰ ਉਹ ਵੀ ਤਾਂ ਖੋਜੀ ਤੇ ਹੋਈ ਕਿਤੇ ਨਾ ਲੋਕਾਂ ਨੇ ਸਭ ਆਦੇ ਕੇ ਸਭ ਤੇ ਹੰਗ ਕੇ ਸਵਾ ਵਿਚਾਲੇ ਕਰਕੇ ਅਸਮਾ ਕਰਦੇ ਫਟਾਫਟ ਬੜਾ ਆदमी ਕੋ ਜਤੀ ਦੇ ਨਹੀਂ ਹੈ ساری ਦੁਨੀਆ ਦੇ ਵਿੱਚ ਤੇ ਜੋ ਹਨੇ ਕਿਤੇ ਕੋਈਆ ਕਿਤੇ ਕੋਈਆ ਖਾਸ ਵਿੱਚ ਦਾ ਹੀ ਫਰਕ ਹੈ ਇਦਾਂ ਹੀ ਫਰਕ ਹੁੰਦਾ ਸਾਰੇ ਹਾਂ ਜਦ ਤੱਕ ਇਹਦਾ ਪੂਰੇ ਦਾ ਪੂਰਾ ਰਸ ਫਿਟਦੇ ਆਉਂਦਾ ਜਿਵੇਂ ਆਪਦਾਰਾ ਸਾਹਮਣੂ ਆ ਬਿਟਾਊਗਾ ਮੇਰੇ ਪੁੱਤੇ ਨੂੰ ਆਪਣੀ ਢਾਣੀ ਵਿੱਚ ਬਿਟਾਊਗਾ ਬਾਹਲੇ ਦੀ ਢਾਣੀ ਨੂੰ ਨਹੀਂ ਬਿਟਾ ਸਕਦਾ ਇਹ ਕਰਕੇ ਹੋਈ ਨਹੀਂ ਬੱਤਾ ਨੇ ਆੜਾ ਅੜ ਕੈੜਾ ਨੇ ਸਾਡੀ نسل ਇੱਕ ਹੈ ਉਡੀ ਸਾਡੀ ਕੌਮ ਹੈ ਨਾ ਕੋਈ ਕੋਈ ਆ ਸਾਰੀਆਂ ਬਤਾ ਹਉ ਤਾਂ ਹਨ ਕੋਈ ਹੈ ਜਿਹੜੇ ਇਹ ਕਹਿੰਦੇ ਨੇ ਵੀ ਰੱਬ ਦਾ ਗੋੜਕ ਕਸਤਾ ਆਪਣੇ ਨਾਲੇ ਆਉਗੀ ਨਾ ਚਲ ਧਾਹਾਂ ਤੇ ਜਾ ਕੇ ਦਿਸਾ ਹੀ ਹੋ ਗਏ ਜਿਹੜਾ ਕਹਿੰਦਾ ਰੱਬ ਦੋ ਆ ਰੱਬ ਪੰਜ ਨੇ ਉਹ ਸਾਡਾ ਨਹੀਂ ਬਦਦਾ ਉਹਨੇ ਅਸੀਂ ਕਿਹਾ ਯਾਰ ਆਪਾ ਹੈ ਹੋਦੀ ਦੋ ਆ ਪੰਜ ਆਲੇ ਨੂੰ ਜਲ ਜ਼ੀ ਹੈਗਾ ਦਾ ਮੰਦਾ ਨਾ ਉਹ ਉਰਵੀ ਮੰਨ ਲਾ ਫਿਰ ਜਿਹੜਾ ਹੈਗਾ ਹੀ ਨਹੀਂ ਮੰਦਾ ਉਹ ਉਹਦੇ ਨਾਲ ਨਹੀਂ ਗੱਲ ਕੋਈ ਨਹੀਂ ਉਹਦੇ ਨਾਲ ਸੀ ਗੱਲ ਕੋਈ ਉਹਦਾ ਇਹ ਗੱਸਾ ਨੂੰ ਭਾਈ ਸਬੂਤ ਕਰਦੇ ਅਸੀਂ ਨਹੀਂ ਮੰਨਦੀ ਠੀਕ ਹੈ ਗੱਸਾ ਤਾਂ ਵੀ ਭਾਈ ਸੱਚ ਸ਼ਕਤੀ ਭਾਈ ਹੋਈ ਹੈ ਇਹ ਸਬੂਤ ਕਰਦੇ ਨਾਲੀ ਤਸੱਲੀ ਕਰਾ ਦੇ ਮੈਂ ਹੈ ਨਹੀਂ ਤਾਂ ਅਸੀਂ ਮੰਨ ਲੀਏ ਉਹਦੇ ਨਾਲ ਆ ਗੱਲ ਹੋ ਸਕਦੀ ਹੋਰ ਕੋਈ ਨਹੀਂ ਸਕਦਾ ਅਰਲੀ ਉਹਦੇ ਹੋਣੀ ਨਹੀਂ ਉਹ ਨੂੰ ਕਮਲਾ ਦੋ ਚੰਦੀ ਗੱਲ ਚੋੜਾ ਹੋਇਆ ਬੈਠਾ ਪਰੇਸ਼ਾਨ ਕਰ ਦੋ ਤੇ ਦਿਖਾ ਦੇ ਸਾਰੀ ਮੰਨ ਲੈਣੇ ਆਪਣੇ ਬੜੇ ਸ਼ਾਂਤ ਹੋ ਜਾਂਦੇ ਅੱਜ ਕੌਣ ਪਰੇਸ਼ਾਨ ਹੈ ਅੱਜ ਕਹਿੰਦਾ ਇਹ ਉਹ ਪਰੇਸ਼ਾਨ ਨੇ ਜਿਹੜੇ ਕਹਿੰਦੇ ਰੱਬ ਹੈਗਾ ਲੋਕ ਸਵਾਲ ਕਰਦੇ ਫਿਰ ਲੁਕਦੇ ਨੇ ਲਾ ਜੀ ਸੰਤ ਕਹਿੰਦੇ ਤੇ ਨੇ ਜਿਹੜਾ ਮੈਂ ਲੈ ਕਿ ਉਹ ਪੂਰੇ ਬੇਦਾ ਰੱਖੇ ਪਰੇਸ਼ਾਨ ਹੈ ਉਹ ਲੋਕ ਪਰੇਸ਼ਾਨ ਨੇ ਜਿਹੜੇ ਕਹਿੰਦੇ ਬਰਵਾਸਾ ਹੈਗਾ ਤੇ ਸਾਡੀ ਕਿਤੇ ਪੋਲ ਨਾ ਨਿਕਲ ਜਵੇ ਅਸੀਂ ਸਾਬਤ ਨਹੀਂ ਕਰ ਸਕਦੇ ਹੈਗਾ ਉਹ ਬੜੇ ਪਰੇਸ਼ਾਨ ਨੇ ਕੋਈ ਲਖਾਇਆ ਹੈ ਉਹ ਨਹੀਂ ਕੋਈ ਪਰੇਸ਼ਾਨ ਪਰ ਜਾਨ ਉਹਨਾਂ ਨੂੰ ਕਰ ਦਈਏ ਕੋਈ ਅਸੀਂ ਬੰਨਾਂ ਨੂੰ ਤਿਆਰ ਨਾ ਸਾਰੇ ਤੁਸੀਂ ਸਾਬਤ ਕਰ ਦਿਓ ਪਰ ਉਹ ਤਾਂ ਪਹਿਲਾਂ ਉਹ ਉਹਨਾਂ ਕਹਿੰਦੇ ਤੁਸੀਂ ਸਾਬਤ ਕਰੋ ਤੁਸੀਂ ਕਹਿੰਦੇ ਹੈਗਾ ਤੁਸੀਂ ਸਾਬਤ ਕਰੋ ਪਹਿਲਾਂ ਜੇ ਜੇ ਤੁਸੀਂ ਸਾਬਤ ਨਹੀਂ ਕਰ ਸਕਦੇ ਫਿਰ ਹੈ ਉਹ ਮਨੋਂ ਤਾਂ ਹੀ ਨਹੀਂ ਕਹਦਾ ਤਰੋ ਉਹ ਗੱਲ ਆਦਮੀ ਕਹਿ ਸਕਦਾ ਉਹਨੂੰ ਜਿਹੜਾ ਆਪ ਸਾਬਤ ਕਰ ਸਕਦਾ ਹੋਵੇ ਵੀ ਮੈਂ ਸਾਬਤ ਕਰੂੰਗਾ ਤੂੰ ਸਾਬਤ ਕਰ ਹੈ ਫੇਰ ਗੱਲ ਤੇ ਬੱਡੀ ਆ ਸਾਬਤ ਕੀ ਕਰ ਸਕਦਾ ਉਹਦਾ ਫਿਰ ਉਹ ਹੀ ਆ ਗੁਰਖ ਦੰਦਾ ਹੈ ਰੱਬੇ ਗੁਰਖ ਦੰਦਾ ਜਿੰਨਾ ਕਿਹਦੇ ਤੇ ਹੈ ਇਹ ਗੁਰਖ ਦੰਦਾ ਹੀ ਰਹੂਗਾ राजीव राम के यानी के दृष्ट समान रूप ज्ञात के दृष्ट समान जैसे राज रंग को लागे तुलपवा जमे हवा राय और रंग को कोई लगती है राजे दी हवा कोई आडर हवा नहीं लगती राजे वास्ते हवा का स्वभाव है आदमी का स्वभाव है स्वभाव का चाहिए ऐसी समान तो चाहिए है ਰੁਪ ਨਹੀਂ ਜਾਂਦੀ ਰੁਪ ਨਹੀਂ ਆਉਂਦੀ ਜੈਸੀ ਹਵਾ ਦੀ ਦਸਤੀ ਕੋਣ ਗੁਰੂ ਆ ਅਵਨ ਗੁਰੂ ਕੇ ਹੋਣ ਪਾਣੀ ਦਤਾ ਪਾਣੀ ਤੋਂ ਆਵੇ ਸ੍ਰਿਸ਼ਟੀ ਸਾਜੀ ਹੈ ਕੋਣ ਨਾ ਨਹੀਂ ਸਾਜੀ ਹੈ ਹਾਂ ਜਾਲ ਕੇ ਬਾਸ ਆਦਾ ਪਾਉਣ ਜਬਾਸ ਨਹੀਂ ਆਇਦਾ ਕੋਣ ਦਾ ਬਾਸ ਆ ਬਾਸ ਚ ਕੋਣ ਦੀ ਕੋਈ ਉਹ ਕੌਣ ਵਿੱਚ ਬਾਸਦਾ ਉਹ ਦੂਹੇ ਰਹਿੰਦਲੇ ਦਾ ਅੱਤਲਾਗਾ ਪੌਣ ਰੂਪ ਹੋ ਜਾਵਾਂਗੇ ਅੱਤਲਾਗਾ ਪੌਣ ਰੂਪ ਚਾਹ ਵਾਹਲਾ ਜਲ ਰੂਪ ਚਲੇ ਜਾਂਦਾ ਜਲ ਚ ਸਮਾ ਜਾਂਦਾ ਜਲ ਚ ਡੁੱਬ ਜਾਂਦਾ ਉਹ ਪੌਣ ਜੀ ਉਹ ਵੀ ਸਾਹ ਲੈਂਦੀ ਵੀ ਉਹਦੀ ਸਾਹ ਲੈਂਦੇ ਵੀ ਜੂਤੀ ਉਹਦੀ ਪੌਣ ਨਾਲ ਜੁੜਿਆ ਕੌਣ ਰ ਆਪਣੋਂ ਦੇ ਤ ਆਪਣ ਸਮਾਇਆ ਉਹੀ ਹੈ ਸਿੱਕੋਂ ਦੇ ਵਿੱਚ ਆਇਆ ਭਾਤੇ ਤੋਂ ਮਨੂ ਉਸ ਮਨੂ ਨੇ ਪੜਨਾ ਕਿਹਾ ਉਸ ਮਨੂ ਨੂੰ ਕਵਨ ਕਿਹਾ ਸਾਲਿਆਂ ਦਾ ਜਿਹੜਾ ਉਪ ਬਣੇ ਹਾਂਜੀ ਬ੍ਰਹਮ ਗਿਆਨੀ ਕੇ ਦ੍ਰਿਸ਼ਤ ਸਵਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ ਬ੍ਰਹਮ ਗਿਆਨੀ ਕਹੇ ਦ੍ਰਿਸ਼ਵਾਨ ਜਿਵੇਂ ਰਾਜ ਰੰਗ ਕੋ ਲਾਗੇ ਤੁਲਪਵਾਨ ਕੌਣ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਉਹ ਤੇ ਤਰਾਜੇ ਨਹੀਂ ਕਰ ਸਕਦਾ ਪਾਉਣਾ ਕਹਿੰਦਾ ਨਹੀਂ ਕੋਈ ਕਦੇ ਜਦ ਐਸਾ ਹੀ ਹਿੱਤ ਆਵਾਜ਼ ਤੇ ਸਬਾਹ ਹੈ ਜੇ ਸਬਾਹ ਹੂ ਰੋਗ ਤੇਰਾਜੇ ਨਹੀਂ ਕਰਦੇ ਚਾ ਤੁਸੀਂ ਆਪਣਾ ਸੁਭਾਅ ਬਣਾ ਲਓ ਕਿ ਸਾਰੇ ਤਰਾਜ ਜਦ ਕਰਦੇ ਨੇ ਥੋੜਾ ਜਿਹਾ ਪਹਿਲਾਂ ਪਹਿਲਾਂ ਹੁੰਦਾ ਪਹਿਲਾਂ ਸਾਡੇ ਸੁਭਾਅ ਚ ਬਦਲਦਾ ਥੋੜਾ ਇੱਕ ਵਾਰ ਅਦਰਾਜ ਹੁੰਦਾ ਤੇ ਤੁਹਾਡਾ ਸੁਭਾਅ ਲਾ ਉਹਨੂੰ ਕਹਿੰਦੇ ਇਹਦਾ ਤਾਂ ਭਈ ਹੁਣ ਸੁਭਾਅ ਹੋ ਗਿਆ ਫੇਰ ਰੜ ਜਾਂਦੇ ਸਾਵਧਾਨ ਕਰਨਾ ਪੈਂਦਾ ਵੀ ਸੁਭਾਅ ਮੇਰਾ ਟਿਕਿਆ ਹੋਇਆ ਹੈ ਤੇ ਐਨੂੰ ਮੈਂ ਜੱਫਾ ਫੜਦਾ ਇਹਨੂੰ ਕੋਲ ਹੋਏ ਮੇਰੇ ਵਾਸਤੇ ਗੱਲ ਦੀ ਲੋਗਾਰੀ ਤਾਂ ਨਾ ਲੋਗਾਰੀ ਤੇ ਆ ਗੋ ਅ ਆ ਵੀ ਰਵੇ ਇਹ ਲੋਗਾਰੀ ਦਾ ਤੇ ਆਵੇ ਹਾਂ ਤੋਗਾਰੀ ਤਾਂ ਬਖਾਰ ਨਿਕਲਦਾ ਜਾਂਦਾ ਨਾ ਜਦ ਹਵਾਵਰ ਦਾ ਸਵਾ ਹੈ ਪਰ ਲੋਗਾਰੀ ਤਾਂ ਹਵਾਵਰ ਦਾ ਹੈ ਮੁੱਠਾ ਤੋਂ ਨਾ हां जी ग्राम गंडिके तीर जी एक वृद्ध यात्री का तीर टिकट तीर जी को अडोल तीर जाए एकदम ले तो तीर जोड़ा अडोल है यानी महाराज जतक जब आ ने इसको यह किसी तरह भी पहुंचो जैसे हृदय का डोहा है ਅਡੋਲ ਵਸਤੂ ਦੀ ਅਧਿਐਨ ਇੱਕੋ ਤੇ ਇਹ ਦੋਹਰੇ ਜੇ ਇਹ ਦੋ ਹੋ ਜਾਂਦੇ ਨੇ ਵੀ ਲੜੀਏ ਕਿ ਨਾ ਲੜੀਏ ਜੇ ਦੋ ਹੋਵੇ ਪਰ ਉਹ ਤਖਤ ਹੋ ਉਹ ਦੋਲਤਾ ਖਤਮ ਹੋਏ ਤੇ ਬੰਦੇ ਬਾਅਦ ਵਿੱਚ ਮੈਂ ਕੋਈ ਸੀ ਤਾਂ ਇਹ ਉਹ ਸੈਂਟਰ ਹੋ ਗਿਆ ਸੀ ਤੇ ਅਡੋਲਤਾ ਰਹਿੰਦੀ ਉੱਥੇ सर तो ही ना अंदरों जो कप्त करता था। ही तो था से था। तो थी पहला ते लड्या था ही में होया थी भाई थारियां रोणा को तो खोर जक कदम कराणो जोंदा माला पुठी भर गी मादा उठ बेठी गी खाने दोई साबित कर रहे थे के जो तो सब पासाला पहला होया है राज नहीं करना सजा देनी है बुढावाद ए भाई थारिए रे तो बुढावाद रो उस बचते काना ਇਦੂ ਨੇ ਮੰਨਦਾ ਉਹਦਾ ਕਹਿੰਦੀ ਸੀ ਇਹ ਦੂਜੇ ਬੰਦੇ ਨੇ ਇਹ ਨਹੀਂ ਬਸ ਫਿਰ ਉਹ ਆਇਆ ਕਿ ਹਾਂ ਹੋਰ ਜਾਰੀ ਕਰੋ ਹਾਂ ਨਿਕਲ ਜਾਣ ਬਸ ਆਵਾਜ਼ ਰੜ ਗਿਆ ਮੈਂ ਬੰਦਾ ਉਹ ਨਾਮਾ ਪਟਾ ਲੱਗਿਆ ਹਾਂ ਬਸ ਉਹਨੇ ਖਾਸ ਕਰਕੇ ਵੀਰ ਨਿਕਲ ਜੂ ਚਲੇ ਗਿਆ ਸਭ ਉਹਨਾਂ ਨੇ ਇਹ ਸੱਚ ਦੋਹਾਂ ਨੂੰ ਸਭ ਕੋ ਦੱਸ ਦਿੱਤਾ ਝੂਠਾ ਕੋਣਾ ਸੱਚਾ ਕੋਣਾ ਆ ਤਾਂ ਉਹ ਤੁਸੀਂ ਐਂ ਕਰੋ ਤੇਰੀ ਵੀ ਫਿਰ ਅਸੀਂ ਆਪੇ ਕਹਾਂਗੇ ਤੁਸੀਂਾਂ ਕੋ ਫਸਸ ਬਹੁਤ ਨਿਕਲ ਜਾਓ ਤੇ ਛੱਡ ਹੋ ਜਾ ਸਾਡੇ ਤੇ ਜਾਂ ਵੀ ਛੱਡ ਗਿਆ ਡੋਊਗਾ ਅ ਉਹਨਾਂ ਦੇ ਨਾਲੇ ਨਾਲ ਜਾਊਗਾ ਤੇ ਗਿਲਿਜਰਾ ਜੂਆ ਸਾਲਾ ਜੂਆ ਛੋਟਾ ਦਾ ਕਹਿ ਤਾ ਨਾ ਥੋੜੀ ਜਿੱਤੀ ਪਈ ਹੈ ਉਹ ਜਿਹੜੀ ਕਹਨਾ ਮੈਂ ਥੋੜਾ ਨਾ ਸਿੱਧਾ ਨਾ ਹੋਣਾ ਤਾਂ ਵਾਟ ਕੜੇ ਇਹ ਨਾਲੇ ਬਾਰਿਦਾਰੀਆਂ ਦੇ ਗੱਲ ਜਿਹੜਾ ਸਾਫਾ ਹੁਣ ਦੱਸੋ ਤੁਸੀਂ ਗ੍ਰਿਫਤਾਰ ਕਰਕੇ ਦੋਸਤਾਂ ਗ੍ਰਿਫਤਾਰੀ ਦਿੱਤੀ ਵਾਹੀ ਦਾ ਜਿੰਦ ਕਰੇ ਧੀਰਜ ਇੱਕ ਧੀਰਜ ਇੱਕ ਧੀਰਜ ਸਿੱਖ ਖਾਲਸੇ ਕੋਲ ਬਾਹਰ ਨਿਕਲਦੇ ਬਾਹਰ ਬੈਠੇ ਨੇ ਸਰਕਾਰ ਦੇ ਹੱਥ ਨਹੀਂ ਜਾਦੇ ਆਂ ਹਮਰਾ ਸਰਕਾਰ ਅਰੇ ਫਿਰ ਵੀ ਬਾਗੀ ਹੋ ਕੇ ਐ ਲੋਕਲ ਬੰਦੇ ਆ ਨਾ ਨਹੀਂ ਸੁਲਾਜੀ ਸੁਲਾ ਸੈਂਟਰ ਗਵਰਨਮੈਂਟ ਨਾਲ ਸੀ ਲੋਕਲਾਂ ਨਾਲ ਖਿਲਾਫ ਹੈ ਫੋਕਲਿਟ ਸਿਆਰੇ ਤਾਂ ਖਿਲਾਫ ਫੌਜ ਦੇ ਖਿਲਾਫੇ ਲੜੇ ਸੈਂਟਰ ਨਾਲ ਉਧਰ ਖਾਨੇ ਗਾਉਂਦੇ ਦੋ ਤੜੇ ਹੋਏ ਸੀ ਬੜੇ ਤਕੜੇ ਹਾਂਜੀ ਜੋ ਚੰਦਰ ਲੈ ਕੋਈ ਖੋਦੇ ਕੋਈ ਨਾ ਜਮੀਨ ਤੂੰ ਖੋਦ ਰਿਹਾ ਕੋਈ ਇਹ ਤੇ ਚੰਦਰ ਨੇ ਲਿਪਰੇ ਆ ਉਹ ਚੰਦਰ ਨੇ ਉਸ ਸਵੇਰ ਨਾਲ ਚੰਦਰ ਨੇ ਫੜਾਣੇ ਤੇ ਸਾਹ ਸਮਝੀ ਤਕਤੀ ਨਾਲ ਹੋਦੜਾ ਨੂੰ ਮੜੋ ਨੂੰ ਤੀ ਤਕਤੀ ਦਾ ਸੁਭਾਵੀ ਆ ਗਿਆ ਪੀਰ ਜੀ ਕਹੇ ਤੀਰੀ ਆ ਗਿਆ ਹੋਵਾ ਦਾ ਵੀ ਆ ਗਿਆ ਚੱਲ ਆ ਗਿਆ ਸੂਰਜ ਅਗਲਾ ਵੀ ਆ ਗਿਆ ਸੂਰਜ ਸੂਰਜ ਵਿੱਚ ਆਂਦਾ ਸੁਭਾਅ ਆ ਅਗਰਾਂੇ ਪਾਣੀ ਨੂੰ ਚੱਕਣਾ ਸਰੂਪ ਦਾ ਊਰਜੇ ਕੇਹਾ ਦਾ ਸੁਭਾਅ ਜੀ ਚਾਰੇ ਤੱਤਾਂ ਦੇ ਸੁਭਾਅ ਜੀ ਇਹ ਚਾਰ ਤੱਤਾਂ ਦੇ ਸੁਭਾਅ ਹੁੰਦੇ ਨੇ ਜਿਹੜੇ ਐਸੀ ਕਿਹ ਨਾਲ ਚਾਰ ਤੱਤਾਂ ਦੇ ਸੁਭਾਅ ਗੱਲ ਜਰੂਰ ਕੀ ਕੇ ਟੀਵੀ ਦੁਆਰਾ ਨਹੀਂ ਕੀਤੀ ਜਿਹੜੀ ਆ ਜਪ ਆ ਸੁਹਣੇ ਵਾਲੀ ਨਹੀਂ ਉਹਨਾਂ ਨੇ ਉਹ ਵੀ ਬਿਹੜੀ ਸਭਨਿਆਸਤ ਉਹ ਸੁਭਾਅ ਉਸ ਕਿ ਉਹ ਆ ਤੋਂ ਦੀ ਦਸੀ ਉਹ ਕਿਉਂ ਦਸੀ ਸਾਡੇ ਗੁਰੂਆਂ ਨੇ ਤਾਂ ਦਸੀ ਨਹੀਂ ਸੀ ਤੁਸੀਂ ਉਹ ਤੋਂ ਦਸੀ ਜਿਹੜੀ ਗੁਰੂਆਂ ਨੇ ਨਹੀਂ ਸੀ ਦਸੀ ਆਹ ਕਹੀ ਦਸੀ ਇਹਦਾ ਮਤਲਬ ਬਿਲਕੁਲ ਉਹਨਾਂ ਨੂੰ ਹਰਮਤਵਾਰੇ ਕੋਈ ਗਿਆਨੀ ਉਹਨਾਂ ਲੋਕਾਂ ਕੋਲ ਹਰਮਤ ਦਾ ਗਿਆਨ ਉਹਨਾਂ ਦੇ ਗੁਰੂਆਂ ਨਾਲ ਜੁੜੇ ਹੋਏ ਸਨ ਜਿਹੜੇ ਸ੍ਰੀਚਨ ਨਾਲ ਜੁੜੇ ਹੋਏ تھے ਜਾਂ ਦੂਜਿਆਂ ਨਾਲ ਜੁੜੇ ਬਾਹਦੇ ਵਿੱਚ ਖਦੂਰ ਸਾਹਿਬ ਪਿਆ ਆਪਣੇ ਇੱਥੇ ਰਾਮਰੇ ਇਹ ਅੱਜ ਜਿਹੜੇ ਸੀ ਆਪਣੇ ਗੋਇੰਦਵਾਲ ਉਹ ਜਿਹੜੇ ਸੀ ਚਾਰੇ ਡੇਰੇ ਜਿਨ੍ਹਾਂ ਖਾਸੇ ਨੂੰ ਕਿਹਾ ਵੀ ਤੁਸੀਂ ਭੇਲ ਨਹੀਂ ਕਰਨਾ ਇਹ ਰਾਮਰੇ ਦਾ ਵੀ ਇੱਕੋ ਬਾਅਦ ਤਾਂ ਕਿਹਾ ਵੀ ਭੇਲ ਨਹੀਂ ਕਰਨਾ ਇਹਨਾਂ ਕੋਲ ਆ ਮੱਥ ਸੀ ਜਿਹਦਾ ਅੱਜ ਪ੍ਰਚਾਰ ਹੋ ਰਿਹਾ ਆ ਪ੍ਰਚਾਰ ਸਿਖਾਇਆ ਸੀ ਗੁਰੂ ਨੇ ਪੜਾਇਆ ਸੀ ਯਾ ਦੱਸੋ ਹੈ ਨਹੀਂ ਸੀ ਗਤਾਲੋ ਵਿਚਾਰ ਬੈਠੇ ਥੋੜੇ ਜੋ ਜੋ ਸੰਤਰੂਪੋ ਪਤਾ ਲਗਣਾ ਸੰਤਤਨਾ ਗੁਰੂਆਰਿਆਂ ਨੇ ਤਾਂ ਗੁਰੂ ਵੱਲੋਂ ਪੜ੍ਹ ਲ ਜਾਣਾ ਉਹਨਾਂ ਨੇ ਨਾਲ ਤੇ ਕੀ ਲਾਣਾ ਕਿਸੇ ਤੇ ਕਿਸੇ ਨਾਲ ਜਿਹੜਾ ਕੋਈ ਨਹੀਂ ਲੜੋ ਉਹ ਆਦਾ ਦੇਖਣਾ ਕਿ ਆਹ ਗੱਲ ਗੁਰੂ ਨੇ ਕਹੀ ਸੀ ਕੱਲ ਸੱਚਾ ਇਹ ਰੰਦ ਆਪਣੇ ਪੈਰ ਬਾੜਾ ਨਾਲ ਉਹਦੀ ਖਰਾਬ ਸੀ ਨਹੀਂ ਇਹ ਸੁਣਨ ਜਾ ਘਰ ਘਰ ਪੜ ਲਾਤੇ ਤੇ ਪਾਣੀ ਸਭ ਦੇ ਜਵਾਨੀ ਪਾਣੀ ਕੰਢਦੀ ਹੈ ਇਹ ਬੜੀ ਵਰਦੀਆਂ ਨੇ ਇਹ ਵੀ ਆਖਿਆ ਮਨੋ ਉਹ ਕਿ ਕੀਤੀ ਹੈ ਇਹਦਾ ਕੋਈ ਜਾਦਾ ਹੀ ਬੜਾ ਕਰਦੀ ਆ ਅਬ ਸੇ ਤੋਕ ਬਣੀ ਦਾ ਰਖਤਾ कि ग्रंठी या मानुष पैदा हुंगा जितु तु सुन ले पाले वे जितु इंगा ते के जो ना सुन है पड़े मतलब उठे पड़े सुना है ना से से किया ताहे दे चंड़ी जट्टी दा कहवे जेडी इच्छा राख के पड़े सुने ओ पूरी हो जाती है ब्राम्हो ज्ञानी का एहे नानक जो ਪਾਵਕ ਦਾ सहज स्वभाव ब्रह्म ज्ञानी रे गुण है मेरे <laughs> ऊपर <तावे> <laughs> तो थाने दो, दो। सेंटर है हां जो पावक आग सीधी आग कहता है पावक सहज स्वभाव सहज स्वभाव ओदा ओदा तो स्वभाव है जेड़ा नेड़े उजागर ना कोई ओदे गल की ਜੋ ਬਾੜੀ ਨੂੰ ਛੱਡਿਓ ਜਾਨਾ ਉਹ ਇਹਨਾਂ ਦੇ ਸੁਆਦਿਲੇ ਤਕਦੀਰੀਓ ਨਹੀਂ ਆਈ